ਉਹ ਕਦੇ ਘਰ ਨੂੰ ਆਉਂਦਾ ਘਿਆਰੀ ਆ ਸੱਚੇ ਨੂੰ ਮੰਮੇ ਨੂੰ ਕੋਰ ਸੱਚੇ ਮਨ ਸੱਚਾ ਮੁਖ ਸੱਚਾ ਸੋਏ ਸੱਚਾ ਮੁਖੀ ਮਨ ਸੱਚਾ ਹੋਵੇ ਤਾਂ ਸੱਚਾ ਅਵਰਨਾ ਨਾ ਇੱਕ ਸੁਨੇ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਇ ਉਹ ਜੋ ਬੰਡ ਭਾਂਡੇ ਚ ਬਾਹਰ ਆ ਮੂਜੋ ਉਹੀ ਬਾਤ ਕਰਨੀ ਹੈ ਬੋਖ ਚ ਸੱਚ ਤਾਂ ਬਿਆਨ ਕਰ ਸਕਦਾ ਕਹਿਣ ਦਾ ਮਤਲਬ ਹੈ ਜੇ ਮਨ ਉਹਦਾ ਸੱਚਾ ਆਪ ਹੈ ਆਪਣਾ ਸੱਚਾ ਜੇ ਮਨ ਕਿ ਸੱਚੇ ਸੱਚ ਭਰਿਆ ਹੋਇਆ ਤਾਂ ਉਹਦੇ ਵਿੱਚੋਂ ਸੱਚ ਬਾਹਰ ਆ ਸਕਦਾ ਮਨ ਸੱਚਾ ਜੇ ਮਨ ਸੱਚਾ ਥੋੜਾ-ਵੋੜਾ ਸੱਚ ਥੋੜਾ-ਵੋੜਾ ਜੁੜਾ ਹੋ ਜਾਏ ਫਿਰ ਬਿਆਨ ਕਰੂਗਾ ਝੂਠਾ ਸੱਚਾ ਯਾਰ ਵਾਲਿਆ ਵਾਲਿਆ ਸ਼ਰਤ ਇਹ ਆ ਬੁੱਖ ਸੱਚਾ ਸੋਏ ਤਾਂ ਹੈ ਹੋਵੇ ਬੁੱਖ ਸੱਚ ਘੜੇ ਦੇ ਵਿੱਚ ਭਾਤਾ ਸਰਬਤ ਕਿਆ ਕਿਡਾ ਕਰਕੇ ਉਹਨੂੰ ਕੱਢਾਂਗੇ ਤੇ ਨਿਕਲੂਗਾ ਉਹੀ ਜੋ ਹੈ ਵਿੱਚ ਘੜੇ ਦਾ ਵੀ ਤਾਂ ਮੂੰਹ ਹੁੰਦਾ ਹੋ ਜੋ ਇਹਦੇ ਵਿੱਚ ਆਪਾਂ ਕੱਢਾਂਗੇ ਜੋ 바ਸੂ ਚੀਜ਼ ਅੰਦਰ ਉਹ ਹੀ ਨਿਕਲੂਗੀ ਸਵੇਰੇ ਬਸ ਆ ਗਏ ਤੇ ਮਨ ਸਾਚਾ ਮੁੱਖ ਸਾਚਾ ਸੋਹੇ ਪਹਿਲੀ ਗੱਲ ਇਹ şartਾ ਇੱਕ ਬਰੁਗਿਆਨੀ ਦੇ ਵਾਸਤੇ ਅਵਰਨ ਪੇਕੇ ਇੱਕ ਸੁਦਨ ਕੋਈ ਦੂਜੀ ਗੱਲ ਇਹ ਹੈ ਕਿ ਕੋਈ ਦੇਖੇ ਸਭ ਦੇ ਵਿੱਚ ਸਭ ਬ੍ਰਹਮ ਹੈ ਸਭ ਬ੍ਰਹਮ ਹੈ ਬ੍ਰਹਮ ਬਿਰਦੇ ਹਿੰਕੋਈ ਸਭ ਅਪੂਰਨ ਬ੍ਰਹਮ ਹੈ ਬ੍ਰਹਮ ਦਾ ਮਤਲਬ ਅਪੂਰਨ ਬ੍ਰਹਮ ਕਿ ਨ ਕੰਪਲੀਟ ਬ੍ਰਹਮ ਕੰਪਲੀਟ ਹੋਣਾ ਕਿੰਨਾ ਇਨਕੰਪਲੀਟ ਇਹ ਕੋਈ ਪਤਾ ਨਹੀਂ ਜਿਹੜਾ ਕੋਈ ਸੱਚ ਕਿੰਨੀ ਕਮੀਆਂ ਤੇ ਸੱਚ ਕਿੰਨੀ ਹੈ ਕਿੰਨੀ ਹੈ ਬ੍ਰਹਮ ਦਾ ਮਤਲਬ ਹੈ ਗੋਡ ਪੂਰਨ ਬ੍ਰਹਮ ਬ੍ਰਹਮ ਦੇ ਨਾਲ ਪੂਰਨ ਬ੍ਰਹਮ ਤਾਂ ਲੱਗਦਾ ਹੈ ਕਿ ਇਹ ਪੂਰਾ ਹੈ ਨਹੀਂ ਬ੍ਰਹਮ ਤਾਂ ਪੂਰਾ ਨਹੀਂ ਹੈ ब्रह्म का मान जेड़ा है, लाया। है। माया कुछ कमी है ब्रह्म आया तो उल्प्त रहता है सुबह करके ब्रह्म नु आया तो उल्प्त रहना चाहिए पर ब्रह्म का माना जो माया जो लिप है इच्छा है ब्रम। ब्रम। वो जो माया भी कुछ ब्रह्म ब्रह्म दीयो अच्छा और दीदी है जो इच्छा त्यागदा जाता है ये बाण ਮਨ ਬੁੱਧੀ ਜੇ ਛਾ ਦੁਹਾਂ ਦੇ ਫੋਟ ਹੈ ਜਿਉਂ-ਜਿਉਂ ਇੱਛਾ ਤਿਆਗਦਾ ਜਾਂਦਾ ਹੈ ਕਿਉਂਦੇ ਉਹ ਬੁੱਧੀ ਕੋ ਬੇਕ ਬੁੱਧੀ ਬੰਦੇ ਚਲੀ ਜਾਂਦੀ ਮਨ ਸਾਚਾ ਉੱਧਾ ਚਲੇ ਹੈ ਹੈ ਖੇਤੀ ਹੁੰਦਾ ਯਾਰ ਉਰਲ ਬਰਫ ਪੜਦਾ ਬਸ ਫਿਰ ਇੱਕ ਹਰ ਦੇ ਰਿਹਾ ਕਿਤੇ ਟੱਕ ਵਾਲਾ ਜਿਹੜਾ ਕੋੜ ਜਿਹੜਾ ਬ੍ਰਹਮਪੂਰਨ ਨਹੀਂ ਹੈ ਉਹਨੂੰ ਨਹੀਂ ਦੇਖਦਾ ਉਹਦੀਆਂ ਗਲਤੀਆਂ ਹੁੰਦੀਆਂ ਨੇ ਉਹ ਦੇਖਉਂਦੀਆਂ ਗਲਤੀਆਂ ਹੀ ਦੇਖੂ ਉਹਦੀਆਂ ਗਲਤੀਆਂ ਦਾ ਮਾਫ ਕਰਦੀਆਂ ਨੇ ਉਹ ਨੂੰ ਨਹੀਂ ਦੇਖਦਾ ਉਹ ਨੂੰ ਦੇਖੂ ਤਾਂ ਤੇ ਗੁੱਸਾ ਆਵੀਆਉਂ ਗੱਲੋਂ ਮਾਫ ਕਰ ਲੈਣਾ ਕੋੜ ਬ੍ਰਹਮ ਪਰਮੇਸ਼ਰ ਅਜੇ ਤਾਂ ਫਿਰ ਹਾਂ ਸਾਰੇ ਕੋੜ ਨੂੰ ਨੇ ਕੋੜ ਬ੍ਰਹਮ ਹੈ ਦਰਕਾਰ ਨੂੰ ਜਗਾ ਸਰਕਾਰ ਕੀ ਦੇਖੂ ਉਹ ਇਹਨਾਂ ਨੂੰ ਦੇਖ ਕੇ ਇਹਨਾਂ ਦਾ ਹੰਡ ਠਾ ਕਰੀ ਜਾਂਦਾ ਇਹਨਾਂ ਦਾ ਸਭ ਕੁਝ ਦੇਖ ਕੇ ਉਹਨਾਂ ਚਿਤਾਰ ਦਾ ਜਾਂਦਾ ਦੁੱਖਣ ਦੇਖ ਕੇ ਜਾਣਦਾ ਵੀ ਇਹ ਵੀ ਨੇ ਖਰਾਬੀ ਕਰਦੇ ਨੇ ਅਗ ਵੀ ਲਾ ਦਿੰਦੇ ਨੇ ਦੂ ਆਪ ਚ 99 ਫੇਵਰੀ ਦੇ ਜਾਂਦਾ ਇਗਨੋਰ ਕਰੀਏ ਲੇਕਿਨ ਉਹ ਕਹਿਣਾ ਹੋਣਾ ਤਾਂ ਇਹ ਜਿਹੜਾ ਅਨਾਦ ਆਪਣੀ ਹੋਈਆਂ ਕਿਹੜਾ ਕਿਸੇ ਦੀ ਓਏ ਆਪਣੇ ਆਪਣੇ ਭਾਈ ਕਹਿ ਲੋ ਸਕੇ ਟੱਬਰ ਆਪਣਾ ਹੀ ਆ ਕਹੇ ਜੀ ਮੁਸਕਾ ਜੀ ਦੇ ਕੋ ਕਰੇ ਜਿਸ ਗਾਇਤ ਜੀ ਦੇ ਕੋ ਕਰੇ ਦੱਸੋ ਕੀ ਕਰੇ ਜੇ ਤਾਂ ਕੋਈ ਗੜਨਾ ਹੋਵੇ ਤਾਂ ਕੋਈ ਦੱਸ ਕਾ ਕਰੇ ਗੋਗਰਨਾ ਹੀ ਦਾ ਗੋਬਹਿਰੀ ਨਾ ਹੀ ਗੋਗਰਨਾ ਇਸ ਕਾਇਦ ਵਾਲਾ ਉੱਥੇ ਹੀ ਆਵਰ ਨਾ ਦੇਖਾ ਇੱਕ ਇੱਕ ਚੋ ਕਿਉਂਕਿ ਉਹਦਾ ਟਾਰਗੇਟ ਜਿਹੜੇ ਇੱਕ ਦਿਨ ਸੱਤਖੜਨੇ ਵਿੱਚ ਕੋਲ ਉੱਥੇ ਉਹਦਾ ਟਾਰਗੇਟ ਛੱਲੇ ਵਾਲਿਆਂ ਦਾ ਟਾਰਗੇਟ ਨਹੀਂ ਛੱਲੇ ਵਾਲਿਆਂ ਦਾ ਕੰਪੀਟੀਸ਼ਨ ਨਹੀਂ ਕਿਸੇ ਸ੍ਰਿਕਾ ਹੀ ਨਹੀਂ ਹੈ ਇਹ ਦੇਖਾਂਗੇ ਉੱਥਾ ਜਿੱਥੇ ਦੇਖਾਂਗੇ ਉੱਥੇ ਸ੍ਰਿਕਾ ਹੋ ਹੋ ਜਾਣਾ ਕਪਾ ਗਾ ਨੂੰ ਦੇਖ ਲੋ ਉੱਥੇ ਸ੍ਰੀ ਕਹੂ ਇਹਦਾ ਚੰਗਾ ਮੇਰਾ ਮਾੜਾ ਇਹ ਇਹਦਾ ਮਾੜਾ ਮੇਰਾ ਚੰਗਾ ਉੱਥੇ ਅਕਾਰ ਉਹ ਘਟਿਆ ਉੱਥੇ ਘਟਿਆ ਵਧੀਆ ਦਾ ਡਿਫਰੈਂਸ ਪੈਦਾ ਹੋਣ ਲੱਗ ਜੂਗਾ ਕੁਝ ਨਹੀਂ ਦਾ ਡਿਫਰੈਂਸ ਪੈਦਾ ਹੋਣ ਨਾਲ ਬਰਾਬਰੀ ਖਤਮ ਹੋ ਜੂਗੀ ਸਰਕਾਰ ਬਦਲਦੀ ਹੈ ਅੱਲਾ ਦੀ ਇਸ ਕਰਕੇ ਥੱਲੇ ਦੇਖਣ ਦਾ ਹੁਕਮ ਇਹਦੇ ਇਤਰੋ ਮੇਰੇ ਹੋ ਹਰ ਦੋਪਹਿਰ ਜੋ ਤਰੀਕ ਸਿਰ ਸਿਰ ਮਾਰੀ ਜਾਂਦਾ ਲੈ ਜੇ ਹੁਣ ਸਾਹ ਨੇ ਹੱਥ ਨਹੀਂ ਕੀਤਾ ਬਾਥੇ ਨੇ ਤੂੰ ਸਿਰ ਮਾਰ ਜਾ ਨਾ ਐ ਤਾਂ ਸੱਦੀ ਕਰਾਉਣੀ ਚਾਹੀਦੀ ਸੀ ਅਸਾਂ ਪੰਡਤ ਨੂੰ ਜੇ ਚਲੋ ਕੁਝ ਨਾ ਹੁੰਦਾ ਉਹ ਤੇ ਅਰਥ ਥੋੜੀ ਬਹੁਤ ਥੋੜੀ ਬਹੁਤ ਜਿਆਦਾ ਕੋਸ਼ਿਸ਼ ਕਰਦਾ ਤੇਗਾ ਜੀ ਹੁੰਦੇ ਇਹ ਪਾਈਓ ਨੇ ਕੋਸ਼ਿਸ਼ ਕੀਤੀ ਹੋਈ ਪਰ ਜਦ ਥੱਲੇ ਨੂੰ ਜਾਣ ਦੀ ਗੱਲ ਸੀ ਫਟਾਫਟ ਲੈ ਗਿਆ ਨਰਖਾਂ ਵੱਲ ਨੂੰ ਉਹ ਕੱਢ ਲੈ ਗਿਆ ਉਹ ਤਾਂ ਪਤਾ ਲੱਗਦਾ ਇਮਾਨਦਾਰੀ ਨਾਲ ਸੀ ਬਿਲਕੁਲ ਸਿੰਪਲ ਕੰਪਨੀਆਂ ਨੇ ਇਹ ਐ ਜਿਹੜੀਆਂ ਲੋਏ ਕਹੀਆਂ ਨੇ ਮੈਂ ਮਾਨਸਾ ਸਾਹਿਬ ਸਿੰਪਲ ਗੱਲ ਹੈ ਆਵਰਨਾ ਤੇ ਕੇ ਕੋਈ ਵੀ ਸਿੰਪਲ ਗੱਲ ਹੈ ਉਹ ਨਹੀਂ ਹੈ ਇਹ ਨਿਤਰੇ ਮੇਰੇ ਹੱਥ ਵਿੱਚ ਜੋतरी ਹੋ ਦੇ ਵਿੱਚ ਵੀ ਕੋਈ ਸਮਝਣ ਦੀ ਕੋਈ ਗੁਰਜ ਨਹੀਂ ਹੈ ਜਿਹਦਾ ਮਤਲਬ ਹੈ ਖੋਜ ਵਾਲਾ ਵਿਸ਼ਾ ਅਰ ਇੱਦਲਾ ਵਿਚਾਰ ਵਾਲਾ ਵਿਸ਼ਾ ਬਿਲਕੁਲ ਇਹ ਨਾਲ ਇੱਕ ਦੀ ਗੱਲ ਹੈ ਪੜਨਾ ਪੜਨ ਕੋਈ ਸ਼ਕਤੀ ਮਿਲ ਜਾਂਦੀ ਹੈ ਪੜਨ ਵਾਲੇ ਕੋਈ ਸੈਂ ਹੋ ਜੂ ਇਹ ਹੈਗਾ ਕੋਈ ਸੁਣਿਆ ਹੋਇਆ ਹੈ ਇੱਕ ਸਮਝ ਲੱਗਿਆ ਜੀ ਸਾਥ ਕਰੇ ਇੱਕ ਜੀ ਨਹੀਂ ਅਗਰ ਨ ਦੇਖੇ ਇੱਕ ਸਮਝ ਕੋਈ ਕੁਸਲਬੀ ਕਾਰਦੀਬਾਰ ਹੀ ਆਇਆ ਉਹ ਇਹ ਇੱਕ ਦਿਨ ਦੀ ਸੰਸਦੀ ਵਿੱਚ ਇੱਕ ਦੇਖੋ ਥੱਲੇ ਨੂੰ ਤੇ ਉੱਪਰ ਨਹੀਂ ਜਾਉਂ ਪਿਛੇ ਨੂੰ ਦੇਖ ਨੂੰ ਦੇਖਦਾ ਉਗਰਮ ਦੇਖੇ ਇਹ ਕਿਸੇ ਨੂੰ ਕੋਈ ਹਾਂ ਜਿਹੜੇ ਉਹ ਤੋਂ ਪਹਿਲੇ ਇੱਕ ਹੋਏ ਹੋਏ تھے ਜਿਹੜੇ ਉਹ ਤੋਂ ਪਹਿਲੇ ਨੇ ਇੱਕ ਉਹੀ ਟਾਰਗੇਟ ਸੀ ਉਹਨਾਂ ਦਾ ਉੱਥੇ ਹੀ ਕੰਪਲੀਟ ਹੋਣ ਦਾ ਕੰਮ ਇਹ ਟਾਰਗੇਟ ਕੰਪਲੀਟ ਹੁੰਦਾ ਸੀ ਹੁਣ ਕੰਪਲੀਟ ਵੀ ਹੋ ਗਿਆ ਹੁਣ ਕੰਪਲੀਟ ਹੋ ਗਿਆ ਤਾਂ ਉੱਗੇ ਹੋਏ ਨੇ ਇਹ ਜੋ ਗਿਆ ਨਹੀਂ ਟਾਰਗਟ ਦਾ ਉੱਥੀ ਉਹ ਸਿੱਕਾ ਹੋ ਗਿਆ ਹੋਇਆ ਇੱਕ ਪਹਿਲਾ ਦਾਲ ਸੀ ਪਹਿਲਾਂ ਤਾਂ ਇੱਕੋ ਹੋਇਆ ਥੱਲੇ ਇਕੱਠਾ ਹੋਇਆ ਧਰਤੀ ਦੇ ਵਿੱਚ ਇਹ ਉਹ ਇਕੱਠਾ ਇੱਕ ਧਰਤੀ ਵਿੱਚ ਇਕੱਠਾ ਹੋਇਆ ਹਿੰਦੇ ਜੰਤਰ ਇਕੱਠਾ ਹੋਇਆ ਬਾਅਦ ਹੀ ਪਤਾ ਲੱਗਿਆ ਫਿਰ ਉਹ ਦੇਖਦਾ ਜਿਆ ਕੋਲ ਆ ਗਿਆ ਵੀ ਇਹ ਹੋ ਗਿਆ ਅੱਗੇ ਆਲਾ ਅੱਗੇ ਦਾ ਸਫਰਜ ਰਹਿਣ ਦੇਉ ਬਜ਼ਾਰ ਸੰਨਾ ਫਿਰ ਥੱਲੇ ਨੂੰ ਜਾ ਕਰਨ ਲੱਗਿਆ ਫਿਰ ਤਾਂ ਆ ਪੀ ਜਾਓ ਜੈਸਾ ਸੇਵੇ ਜੈਸਾ ਹੋਵੇ ਜਿੱਦ ਤੱਕ ਧਿਆਨ ਹੋ ਧਿਆਨ ਚੋ ਗਿਆਨ ਬਲ ਹੋਣਾ ਧਿਆਨ ਮੈਂ ਜਾਣਿਆ ਚਾਹੇ ਦੁਨੀਆਵੀ ਗਿਆਨ ਹੈ ਚਾਹੇ ਦੁਨੀਆ ਤੋਂ ਬਹਾਰ ਦਾ ਗਿਆਨ ਧਿਆਨ ਤੇ ਬਿਨਾ ਗਿਆਨ ਨਹੀਂ ਮਨ ਸੱਚਾ ਮੁਖ ਸੱਚਾ ਹੋਏ ਅਵ ਅਵਰਨ ਪੇਖੇ ਐਕਸ ਰੇਨ ਕੋਏ ਮਾਨਸਾਚਾ ਮੁਖ ਸੱਚਾ ਹੋਏ ਇਹ ਲਖਣ ਬ੍ਰਹਮ ਗਿਆਨੀ ਹੋਏ ਮਾਨਸਾਚਾ ਮੁਖ ਸੱਚਾ ਹੋਏ ਜੇ ਮਨ ਸੱਚਾ ਹੋ ਗਿਆ ਫੇਲਾ ਸਾਚਾ ਹੀ ਹੈ ਸਾਹਮਣੇ ਵਿੱਚੋ ਸੱਚ ਬੋਲੂਗਾ ਜੇ ਜੋ ਮਨ ਸੱਚਾ ਨਹੀਂ ਤਾਂ ਫੱਝ ਬੋਲ ਦੇਸੋ ਉਹ ਸੱਚਾ ਸੋਏ। ਭੁੱਖ ਦੇ ਖੱਖੇ ਨੂੰ ਸਿਆਰੀ ਕਰਕੇ ਭੁੱਖ ਦੇ ਵਿੱਚ ਸੱਚ ਹੋਊਗਾ, ਬੋਲੂਗਾ ਸੱਚ। ਜਦ ਨਿਕਲੂਗਾ ਭੁੱਖ ਤੇ ਸੱਚੇ ਨਿਕਲੂਗਾ। ਭੁੱਖ ਵਿੱਚ ਆ ਜਿਹੜੀ ਗੱਲ ਹੈ ਜੋ ਹੁੰਦਾ ਰਹਾ ਨਾ। ਜਦ ਨਿਕਲੂਗੀ ਬਾਤ ਅਸੱਤੂ। ਆਵੰਨਾ ਦੇਖੇ ਕਿਸ ਨੂੰ ਕੋਈ ਕੋਈ ਨਹੀਂ ਹੁੰਦੀ ਆ। ਉਹ ਇੱਕ ਦੇ ਤਨੋਰ ਕੇ ਕੁਝ ਫਿਰਦਾ ਪੂਰਨ ਬ੍ਰह्म ਦਾ ਦ੍ਰਿਸ਼ਟੀ ਹਉਂ ਤੇ ਨਹੀਂ ਆਉਂਦਾ। ਪਰਮ ਬ੍ਰਹਮ ਤੋਂ ਬਿਨਾਂ ਹਾਂ? ਪਰਮ ਬ੍ਰਹਮ ਤੋਂ ਬਿਨਾਂ ਪੂਰਨ ਬ੍ਰह्म ਪੂਰਨ ਬ੍ਰह्म ਨਾਲ ਨੂੰ ਦੇ ਕੋਲ ਜੋ ਪੂਰਨ ਬ੍ਰह्म ਦੇ ਭਾਰਮਣੇ ਬ੍ਰਹਮ ਦੇਖ ਰਿਹਾ ਨਾ ਬ੍ਰਹਮ। ਜਿਹੜਾ ਹੈਗਾ ਸਰੀਰ ਵਿੱਚ ਪੂਰਨ ਬ੍ਰह्म। ਇਹ ਪੂਰਨ ਬ੍ਰਹਮ ਦੀ ਆਤਮ ਆਪ ਆਪਣੇ ਆਪ ਨੂੰ ਦੇਖ ਰਿਹਾ ਆਤਮ ਧਿਆਨੀ ਆਪਣੇ ਆਪ ਨੂੰ ਦੇਖਣਾ ਸੱਚਖੰਡ ਭਗਤ ਕਿੱਥੇ ਪਸਦੇ ਨੇ ਸੱਚਖੰਡ ਦੀ ਓਏ ਸ਼ਬਦ ਸੱਚਖੰਡ ਹੀ ਬਸਦਾ ਸ਼ਬਦ ਇੱਥੇ ਔਰ ਉੱਥੇ ਧੋਈ ਜਿਹਾ ਬਸਦਾ ਸ਼ਬਦ ਤਾਂ ਇੱਥੇ ਔਰ ਉੱਥੇ ਧੋਈ ਜਿਹਾ ਬਸਦਾ ਉਹ ਸੱਚਖੰਡ ਜਨ ਹੈ ਸ਼ਰੀਰ ਕਰਕੇ ਸਭ ਇੱਥੇ ਉੱਥੇ ਸਾਰੀ ਸਰਬ ਵਿਅਕਤੀ ਹੈ ਆਦਿ ਜਿਕੇ ਕੜਾ ਉੱਥੇ ਖੜਾ ਹੈ ਉਹਦੀ ਆਵਾਜ਼ ਜਿਹੜੀ ਹੈ ਕਿਤੇ ਵੀ ਜਾ ਸਕਦੀ ਹੈ ਆਵਾਜ਼ ਤਾਂ ਕਿਤੇ ਵੀ ਜਾ ਸਕਦੀ ਆ ਅਬਰ ਨਾ ਦੇਖੇ ਇੱਕ ਸੁਨੇ ਸੋਏ ਉਹ ਆਤਮ ਉਸੇ ਆ ਸਭ ਆਤਮ ਅਥਿਆਸੀ ਜਿਉਂ ਨੀਓ ਤਾਂ ਹੀ ਆਤਮ ਧਿਆਨ ਵਿੱਚੋਂ ਹੀ ਉਹ ਜਿਹੜਾ ਸ਼ਬਦ ਪਰ ਸੁਣਨਾ ਹੋਵੇ ਅਗਲਾ ਗਿਆਨ ਹੋਵੇ ਤਾਂ ਮੈਂ ਤੇ ਹਾਂ ਕਿ ਹੁਵੇ ਜਾ ਹਾਂ ਤੋਂ ਜੜੀ ਹੈਗੀ ਹੈ ਜੋ ਗੁਰਬਾਣੀ ਆਪਾਂ ਸੁਣੀ ਹੈ ਹੁਣ ਕਰਨਾ ਨਾਲ ਚ ਇਹੀ ਉਹਦੇ ਧਿਆਨ ਚ ਇਸ ਨੂੰ ਸਮਝ ਰਿਹਾ ਬ੍ਰਿਤੀ ਨਾਲ ਇਹ ਇੱਥੇ ਕਿਹਾ ਹੈ ਅਗਲ ਕਹੀ ਹੈ ਕਿ ਤਾਂ ਇੱਥੇ ਹੀ ਹੈ ਉਹ ਉੱਥੇ ਹੀ ਗੁਰਬਾਣੀ ਨੂੰ ਸਮਝਦੇ ਉੱਥੇ ਹੀ ਆਪਣਾ ਦੇ ਜਿੱਥੇ ਮਨ ਸੁਣਨ ਹੁੰਦਾ ਸੁਨ ਸਵਾਦ ਅਨਹ ਤਹਿ ਨਾਦ ਕਹਿੰਦੇ ਜਿੱਥੇ ਮਨ ਚੁੱਪ ਕੀਤਾ ਬੈਠਾ ਨਾਦ ਦੇ ਵਿੱਚੋਂ ਹੀ ਬਾਹਰ ਕੇ ਨਿਕਲਣਾ ਉਹ ਜਿੱਥੇ ਥੱਪ ਗਿਆ ਨਾ ਮਨ ਮੰਦਰ ਵਿੱਚ ਮਨ ਸਾ ਥੱਪ ਇੱਥੇ ਮਨ ਦੀ ਇੱਛਾ ਦੀ ਥੱਪੀ ਖੜੀ ਹੋ ਗਈ ਉਹਦੇ ਵਿੱਚੋਂ ਹੀ ਥੱਪ ਬਾਹਰ ਕੇ ਨਿਕਲਣਾ ਉਹ ਥੱਪ ਬਾਹਰ ਕੇ ਉੱਥੋਂ ਨਿਕਲਣਾ ਮਨ ਮੰਦਰ ਵਿੱਚ ਮਨ ਦੀ ਇੱਛਾ ਮਨ ਸਾ ਕੱਪੇ ਨਾ ਇਹ ਥੱਪ ਪਾੜਿਆ ਇੱਥੋਂ ਪੈਦਾ ਹੋਇਆ ਉਹ ਯਾਰ ਪਰਲਾਦ ਦੀ ਰੱਖਿਆ ਕੀਤੀ ਹੈ ਨਾ ਉਹ ਨਾ ਟਿਕੀ ਉਹ ਥਮਲੇ ਜੋਤੀ ਬਾਹ ਨਾ ਜੀ ਮਨਮਨਦਰ ਵਿੱਚ ਮਨਸਾ ਥਪ ਕਹਿ ਕੇ ਕਬੀਰ ਨੇ ਉਹ ਗੱਲ ਕਹਿਤੀ ਉਹ ਜੀ ਉਸੇ ਕਰਦੀ ਉਹ ਥੰਮ ਜਾ ਥੰਮ ਧਿਆਨ ਹੈ ਨਾ ਥਮ ਜਾਂ ਥਮ ਗਿਆ ਨਾ ਇੱਛਾ ਧਵੀਆਂ ਧਿਆਨ ਹੈ ਥਮਿਆ ਇੱਛਾ ਰੁਕਿਆ ਧਿਆਨ ਰੁਕਿਆ ਧਿਆਨ ਉਹ ਜਾਨੇ ਧਿਆਨ ਵਿੱਚ ਹੋਇਆ ਪ੍ਰਗਟ ਹੋਣਾ ਉਹ ਸ਼ਬਦ ਉਹ ਧਿਆਨ ਚੋਂ ਸ਼ਬਦੇ ਪ੍ਰਗਟ ਹੋਇਆ ਬਲਾ ਤੇ ਹੋਰ ਕੀ ਹੋਇਆ ਅੰਦਰੋਂ ਹੀ ਪ੍ਰਗਟ ਹੋਈਆ ਨਿਰਭੈਤਾ ਨਿਰਭੈ ਗਿਆਨ ਚੁਪ ਕਰਾਤਾ ਬੁਰਤੀ ਬੰਦ ਕਰਾਤੀ ਬਾਬ ਦੀ ਰੋਜ਼ੀ ਕੱਲ ਕੁਝ ਵੀ ਨਹੀਂ ਸੀ ਬਹੁਤ ਵੱਡਾ ਵਿਦਵਾਨ ਸੀ ਉਹ ਉਹਦਾ ਬਾਪ Vishnu Raja ਸੀ avatar ਸੀ ਕਹਤਾ ਸੀ ਪਰ ਦਾ ਕਹਤਾ ਸੀ ਵੇਦ ਦਾ ਗਿਆਤਾ ਸੀ ਵੇਦ ਤੋਂ ਥੱਲੇ ਉਤਰਿਆ ਆਇਆ ਆਪਣੇ ਆਪ ਨੂੰ ਹਸਤੀ ਮੰਨਦਾ ਸੀ ਉਹ ਤਾਂ ਦੀ ਗੱਲ ਕਰ ਉਹ ਬੜਾ ਗਿਆਸ ਹੋ ਪਾਇਆ ਤਕ ਤੂੰ ਨਹੀਂ ਸੀ ਜਦ ਕੌਣ ਸੀ ਪ੍ਰੋਫੈਸਰ ਇਹ ਦੱਸ ਤੂੰ ਪ੍ਰੋਫੈਸਰ ਆ ਤੇਰਾ ਬਾਪ ਕੀ ਸੀ ਕੀ ਪ੍ਰੋਫੈਸਰ ਦਾ ਬਾਪ ਹੁੰਦਾ ਪ੍ਰੋਫੈਸਰ ਜੰਮਦਾ ਹੁੰਦਾ ਹੋਤੀ ਬੰਦ ਹੋ ਗਈ ਬਾਪ ਦੀ ਹੋਰ ਕੀ ਸੀ ਤੇਰੇ ਬਾਪ ਦਾ ਵੀ ਬਾਪ ਸੀ ਉਦੋਂ ਪਹਿਲਾਂ ਪ੍ਰੋਫੈਸਰ ਕੋਈ ਹੋਰ ਹੋਊਗਾ ਇਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਪ੍ਰੋਫੈਸਰ ਪਣੀ ਅਧਰਸਾ ਨਹੀਂ ਲਿਆ ਕਰ ਤਾਂ ਕਿਹਾ ਇਸ ਆਪ ਤਾਂ ਪੂਰੀਆਂ ਕਰ ਸਾਦਾ ਬੇਦਾਲੀਆਂ ਇਹਦੇ ਸਾਰੀਆਂ ਵਰਦਾਲੀ ਜਾਂਦਾ ਨਹੀਂ ਉਹ ਕ੍ਰਿਸ਼ਨ ਤੇ ਲਿਆ ਕੇ ਗੱਲ ਕੇ ਜੋ ਕਹੋ ਕ੍ਰਿਸ਼ਨ ਜੋ ਨਾ ਜੋ ਕਹੋ ਰਾਮ ਜੋ ਨਾ ਹੈ ਜੇ ਤੁਸੀਂ ਕਹਿੰਦੇ ਹੋ ਰਾਮ ਅਜੋਨੀਆ ਜਾਇਆ ਹੈ ਕਾਹੇ ਕੋ ਕੌਸ਼ਲ ਕੁਖ ਜਯੋ ਆਹ ਗੱਲ ਕਹੀਏ ਉੱਥੇ ਬਲਾਦ ਦੇ ਆਪਣੇ ਬਾਪ ਨੂੰ اور رات ہی ورتا नहीं दसी پتہ سفید تھی اجیکٹ پر لاگ نے کیہ بات تصدی گپتا کیونکہ پیچھے دسی ہوئی ائی نہیں ساڈے تو یعنی کی پیچھے नहीं ائی اسی نہیں کہہ سکتے دو اپ کو ویلا ثبوت کی ہے بیتاں نال ساڈے کوئی ثبوت ہے ود ہے گے نہیں بیتاں نال وربانیں نے ذکر کیتا ود ہے گے نہ ساڈے ਫਟਾ ਲੈ ਜਿਹੜਾ ਹੈਗਾ ਮਤਲਬ ਤਤ ਗਿਆਨ ਨਾਲ ਆਦਮ ਗਿਆਨ ਆਦਮ ਗਿਆਨ ਵੀ ਵੇਦ ਦੇ ਵਿੱਚ ਹੀ ਹੈ ਸਾਜੀ ਨਾਲ ਕੇ ਇਹ ਲੱਛਣ ਪਰਮ ਗਿਆਨੀ ਹੋਇਆ ਅੱਗੇ ਆ ਜਾ ਨਾਲ ਕੇ ਇਹ ਲੱਛਣ ਪਰਮ ਗਿਆਨੀ ਹੋਇਆ ਨਾਲ ਕਹਿੰਦਾ ਵੀ ਇਹ ਜਿਹੇ ਲੱਛਣ ਹੋਣ ਕਿਸੇ ਬੰਦੇ 'ਚ ਸਭ ਲੋਕ ਪਰਮ ਗਿਆਨੀ ਨਹੀਂ ਹਰੂ ਪਰਮ ਗਿਆਨੀ ਬਣਿਆ ਜਾ ਸਕਦਾ ये लक्षण तू सी देख ले मु ताऊ बरप गांधी मना जा सकता है यदि तू जेड़ा खोटे घरे दी पहचान है एक ही है अह सिख की है सिख जेड़ा है हर हीरा जन जौरी हरता हीरा है। सब दे अंदर है हर कट कट में हर जुबस जेड़ा जान है सिख है ਸਿੱਖਿਆ ਜਾਣਣਾ ਜਾਂ ਜਾਣੇ ਨੂੰ ਜਾਨ ਕਹਿਦੇ ਨੇ ਸਿੱਖ ਨੂੰ ਜੋ ਗਿਆਨ ਲੈਣਾ ਜਾਨ ਬਣਾਉਣਾ ਹੈ ਉਹ ਜੋਤੀ ਬਣਾਉਣਾ ਹੈ ਜੋਤੀ ਦੇ ਬਣਾ ਦੀ ਜੋਤ ਜੋ ਗਿਆਨ ਪਛਾਣ ਉਤਾਰ ਲੀਏ ਸਰ ਹੀਰਾ ਝੜਦਾ ਹੀਰਾ ਛਾੜਕਾ ਕਰੇ ਅਰਚੀ ਆਸ ਤੇ ਨਾਲ ਦੁਜਕ ਜਾਏਗੇ ਸੱਚ ਭਾਵ ਭਗਤ ਰਵਦਾਸ ਇਹੋ ਲੋ ਹੱਥ ਛੱਡਿਆ ਹੋਇਆ ਸਬਦਾ ਹਰਦਾ ਹੀਰੇ ਪਰ ਜੰਦ ਜੋਰੀ ਦੀਨਾ ਹੈਗਾ ਇਹ ਜੋਰੀ ਬਣਾ ਰਹੀ ਹੈ ਗੁਰਬਾਣੀ ਕਿਤੇ ਭਲੇਖਾ ਨਾ ਖਾ ਜਿਓ ਚੋਰ ਨੂੰ ਗੁਰੂ ਘਰ ਆ ਲੋ ਨੂੰ ਪਛਾਣ ਨਾ ਆਵੇ ਤੇ ਸਾਧ ਮੜ ਜਾਉ ਦੀ ਪਛਾਣ ਨਾ ਆਵੇ ਥੱਗ ਮੜ ਜਾਉ ਨ ਗੁਰੂ ਘਰ ਬੈਠੂ ਆ ਦੇ ਰਈਆ ਬ੍ਰਹਮਣ ਤੁਹਾਨੂੰ ਇਹ ਤਾਂ ਜੇ ਸਮਝ ਆਉਂਦੀ ਲੋੜ ਨਹੀਂ ਕਿਸੇ ਦੀ ਆ ਸਮਝੀ ਜਾਓ ਆਪੇ। ਜੇ ਬੁੱਧੀ ਕੋਈ ਨਹੀਂ ਹੁੰਦੀ। ਜੇ ਦੀ ਖੋਜ ਵੱਧ ਹੁੰਦੀ ਐ ਜੇ ਦੀ ਘਟ ਹੁੰਦੀ ਐ। ਬੁੱਧੀ ਵੀ ਕੋਈ ਹੈ ਨਹੀਂ ਆਪਣੀ ਪਿੱਛੋਂ ਆਈ ਹੋਈ। ਕੋਈ ਵੱਡ ਬੁੱਧੀ ਵਾਲਾ ਮੰਨਦਾ ਉਹਦੇ ਲੈ ਲਓ ਕੋਈ ਚੀਜ਼। ਘਟ ਬੁੱਧੀ ਵਾਲਾ ਮੰਨਦਾ ਦੇ ਦਿਓ। ਇਹ ਕਾਹਤ ਬੁੱਧੀ ਵਾਲੇ ਗਿਆਨ ਨੇ ਜਿਹੜੇ ਘਟ ਗਿਆਨ ਨਾਲੇ ਤੋਂ ਲੋਕ ਗਿਆਨ ਨਹੀਂ ਰਹੇ ਨੇ। ਲੈ ਰਹਿਣਗੇ ਲੈ ਰਹੇ ਨੇ। ਵੱਧ ਗਿਆਨ ਨਾਲੇ ਗਿਆਨ ਦੇ ਰਹੇ ਨੇ। ਉਹਨਾਂ ਤੋਂ ਬਦਾਲੇ ਹੱਥੇ ਹੁ ਲੈ ਰਹੇ ਇਹ ਕੋਈ ਸਿਸਟਮ ਚੱਲਦਾ ਹੀ ਹੈ ਔਰ ਇਹ ਚਲਾਣਾ ਵੀ ਜ਼ਾਇਦਾ ਜ਼ਾਇਰੀ ਹੈ ਘਟ ਵਾਲਿਆਂ ਨਾਲ ਗਿਆ ਤਾਂ ਹੀ ਉਹ ਜੇ ਬਦਾਲੇ ਦੇਣ ਨਾ ਘਟਾਲੇ ਲੈਣ ਨਾ ਫੇ ਗੱਡੀ ਫੇਕਾ ਬੈਠੇ ਲੱਗੂ ਆਏਗਾ ਕੋਈ ਸੀ ਸਾਡੇ ਪੱਡ ਗਿਆ ਵਾਲੇ ਘਟ ਗਿਆ ਨਾਲ ਬੇਸ ਨੂੰ ਚਾਰ ਨਹੀਂ ਸੀ ਅਦਰ ਦਿਉਤਾ ਹੀ ਨਹੀਂ ਸੀ ਕੋਈ ਜਾਂਦੇ ਸੀ ਉਹ ਤਾਂ ਆਨਗੁਰੂ ਬਣੇ ਬੈਠੇ ਉਹ ਕਰਦੇ ਸੀ ਤੈਨੂੰ ਉਹਦਾ ਹਿੰਨੇ ਸਾਲ ਹੋ ਗਏ ਨੂੰ ਕੋੜ ਨਹੀਂ ਸੀ ਕੁਝ ਇਹਦਾ ਬੁੱਕਣ ਵਾਲੀ ਚੀਜ਼ ਸਕੂਲਾਂ ਦੇ ਦਰਿਆ ਕਰਦੇ ਤੋਂ ਪਹਿਲੀ ਵਾਲਾ ਨੂੰ ਕਹਿੰਦਾ ਦੱਸ ਮੈਂ ਇਹਨੇ ਭਾਈ ਦਸਵੇਂ ਵਾਲਾ ਜਿਆਦਾ ਪੜਿਆ ਹੋਇਆ ਤੂੰ ਆ ਜਾ ਹਾਂ ਤੂੰ ਕੱਟ ਪੜ ਲੈ ਠੀਕ ਹੈ ਤੂੰ ਫੇਲੀ